ਸੇ ਲੋਕ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਅੰਮਿਓ ਰਸ ਅੰਮ੍ਰਿਤ ਹਰਿ ਕਾ ਨਾਉ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਉ ਅੰਮ੍ਰਿਤ ਬਾਣੀ ਜਿਹੜੀ ਹੈਗੀ ਉਹ ਲੋਰਾ ਸਾਹਿਬ ਉਹ ਵੀ ਬਰਤਨ ਕਹਿੰਦੇ ਨੇ ਪਰ ਰਸ ਆਇਆ ਇਹ ਅੰਮ੍ਰਿਤ ਰਸ ਗੁਰਬਾਣੀ ਚ ਜਿਹੜਾ ਰਸ ਆਉਂਦਾ ਨਾ ਆਪਾਂ ਨੂੰ ਗਿਆਨ ਬਰਦਾ ਜੋ ਸਾਚਦਾ ਇਹੀ ਰਸ ਹੈ ਰਸ ਅਬਰਤ ਕੀ ਹਰ ਦਾ ਨਾਮ ਜਿਹੜਾ ਨਾਮ ਗੁਰਬਾਣੀ ਚ ਨਾਮ ਇਹਨੂੰ ਕਹਿੰਦੇ ਨੇ ਗਿਆਨ ਤਤ ਗਿਆਨ ਇਹ ਅਬਰਤ ਰਾਸ ਹੈ ਇਹ ਤੁਰਕੀ ਬਾਣੀ ਜਿਹੜਾ ਹੁੰਦਾ ਉਹ ਤਾਂ ਹੁੰਦਾ ਫੁਰਨੇ ਦਾ ਰਾਸ ਹੁੰਦਾ ਗੁਰਬਾਣੀ ਆ ਇਹਦੇ ਵਿੱਚ ਅਮਿਓ ਹੈਗਾ ਗਿਆਨ ਰਾਸ ਹੈ ਜਿਹੜਾ ਗਿਆਨ ਹੈ ਉਹ ਜਿਹੜਾ ਬਿਨਾਂ ਕੱਲਾਂ ਤੇ ਸੁਣਨ ਵਾਲੇ ਨਾਮ ਅਬਰਤ ਉਹ ਨਾਮ ਹੁਕਮ ਹੈ ਉਹ ਵੀ ਉਹ ਵੀ ਉਹਨੂੰ ਸੁਣ ਕੇ ਇਹ ਲਿਖੀ ਆ ਅੱਛਾ ਜੀ ਉਹ ਹੋਰ ਤਰ੍ਹਾਂ ਦਾ ਇਹ ਉਹਦਾ ਦੱਸਦਾ ਸਿਰਫ ਗਿਆਨ ਨੇ ਹੈ ਤਾਂ ਹੀ ਹਰਕਾ ਨਾਂ ਲਿਖਿਆ ਹੈ ਪੜ ਕੇ ਸੁਣ ਕੇ ਸਮਝ ਕੇ ਹੁਕਮ ਉਹ ਬੁੱਝਣਾ ਉਹਦਾ ਹੁਕਮ ਆ ਉਹ ਬੁੱਝਣ ਵਾਲੀ ਚੀਜ਼ ਅੱਛਾ ਜੀ ਇਹ ਉਹਦਾ ਗਿਆਨ ਜੈਸਾ ਸਤਗੁਰੂ ਕਹਤ ਹੀ ਮੈਂ ਡੀਡ ਤਾਂ ਹੀ ਲਗਾਇਆ ਸੀ ਨਾ ਹੋ ਬੜਿਆ ਹੋਇਆ ਤਾਂ ਸੁਣਿਆ ਸੀ ਚਾਹੇ ਪੁੱਤਾਂ ਚਾਹੇ ਸੁਣਿਆ ਜਾਂ ਦਰਸ਼ਨ ਹੋਇਆ ਡਾਇਰੈਕਟਰ ਨਾਲ ਮਿਲਿਆ ਤਾਂ ਕਹਿੰਦੇ وہی ਗੱਲ ਠੀਕ ਸੀ ਜੈਸਾ ਸੁਣੀਦਾ ਸੀ ਉਹ ਜੈ ਦੇਖ ਲਿਆ ਹਾਂਜੀ ਮਨ ਤਨ ਹਿਰਦੈ ਸਿਮਰ ਹਰ ਆਠ ਹਰ ਜਿਹੜਾ ਹੈਗਾ ਹਿਰਦੇ ਵਿੱਚ ਮਨ ਦੇ ਵਿੱਚ ਚਾਹੇ ਹਿਰਦੇ ਵਿੱਚ ਹੈ ਕੋਈ ਗੱਲ ਹੈ ਤਨ ਵਿੱਚ ਬਸ ਤੇ ਬਿਜਲੇ ਇਸੇ ਨੂੰ ਦੇ ਸਪੇਸ ਨੂੰ ਉਹਨੂੰ ਸਿਵਨ ਉੱਥੋਂ ਸਬਰੋ ਉੱਥੇ ਉੱਥੇ ਲਿਆਓ ਤੇ ਆਣ ਆਣ ਉੱਤੇ ਟਿਕਾਓ ਉੱਥੋਂ ਮਿਲਣਾ ਨਾ ਰੋਣ ਦੇ ਹਰ ਕੁਬ੍ਰਤ ਲਿਆ ਉਥੋਂ ਪੈ ਅੱਖੇ ਜੁੜੀ ਰਹੂਗੀ ਵਰਤੀ ਗੁਰ ਕੋ ਰਹੋਗੇ ਜੇ ਉਤੋਂ ਸੰਪਰਕ ਹੋ ਗਿਆ ਫਿਰ ਅੱਖੇ ਪੈ ਜੁੜੇ ਰਹੂਗੇ ਨਾਮ ਨਾਲੇ ਹਾਂਜੀ ਉਪਦੇਸ਼ ਸੁਣੋ ਤਮ ਗੁਰ ਸੱਚਾ ਇਹ ਸੁਆਓ जनम पदार्थ सफल होए मन में लायो पाओ आ उपदेश है गुरुवाणी दा उपदेश उपदेश सुनो तुम गुरु उपदेश सुन के मन प्रेम करियो एवी भूख पैदा करियो नाम दी नाम पैदा होगी थाके नाम की लागा भूख ओस नाम दी पैदा करियो उपदेश सुनो तुम गुरु सीखो सच्चा एहि सुआओ जंदे विच अपना सच्चा मतलब एही है ਜਾਣੋ ਲੈਣ ਦਾ ਮਤਲਬ ਤਾਂ ਹੈ ਉਪਦੇਸ਼ ਸੁਣਨਾ ਹੀ ਉਪਦੇਸ਼ ਸੁਣਨਾ ਹੈ ਬੰਨਾ ਕੇ ਪਾਉ ਲੰਭੂ ਭੁਖ ਲਾਂਭ ਦੀ ਲੱਗੂਗੀ ਜਨਮ ਲਿਆ ਆਪਾਂ ਨੇ ਜਨਮ ਪਦਾਰਸ਼ ਸਫਲ ਹੋਏ ਮਨ ਮੈਂ ਲਾਇਓ ਪਾਓ ਨਾਨਕ ਨਾਮ ਜਪਤ ਸੁਖ ਉਪਜੈ ਦਰਗਾ ਪਾਈਏ ਥਾਉ ਜਨਮ ਪਦਾਰਸ਼ ਸਫਲ ਹੋ ਜਵੇ ਇਹਦਾ ਜਨਮ ਲੈ ਲੈ ਕੋ ਲਾਭ ਹੋਵੇ ਜੇ ਮਨ ਮੈਂ ਲਾਇਓ ਪਾਓ ਮਨ ਦੇ ਵਿੱਚ ਪ੍ਰੇਮ ਕਰਿਓ ਜਿਤ ਪ੍ਰੇਮ ਕੀਓ ਤੈਨਹੀ ਪ੍ਰਪਾਇਓ ਦੁਰਬਾਣੀ ਨਹੀਂ ਦਾ ਪ੍ਰੇਮ ਉਹਦਾ ਸਭ ਨਾਲੇ ਪ੍ਰੇਮ ਹੈ। ਹਾਂਜੀ। ਸੂਖ ਸਹਿਜ ਆਨੰਦ ਘਣਾ। ਸੁਖ ਸਹਿਜ ਅਵਸਥਾ ਟਿਕਾਓ। ਆਨੰਦ ਘਣਾ। ਜੇ ਟਿਕਾਓ ਹੁੰਦਾ ਤਾਂ ਸੁਖਰਾ ਰੰਤ ਬਹੁਤ ਹੁੰਦਾ। ਟਿਕਾਓ ਦੇ ਵਿੱਚ ਸੁਖ ਆਨੰਦ ਸਹਿਜ ਅਵਸਥਾ ਕਹਿੰਦੇ ਟਿਕ ਜਾਂਦਾ। ਬੰਦੇ ਸਹਿਜ ਹੋਣ ਤੇ ਬੰਦੇ ਟਿਕਾਓ ਦੇ ਵਿੱਚ ਹੀ ਰਉ ਆਰਨ ਦੇ ਬਹੁਤ ਜਿਆਦਾ ਸੁਖਾਂ ਨਾਲ ਕਰੋ ਪ੍ਰਭ ਜਪਨਤਿਆਂ ਦੁੱਖ ਜਾਏ ਆਪਰੇ ਮੋਰ ਨੂੰ ਜਾਣਦੇ ਆ ਜਾਣਦੇ ਆ ਸਮਝ ਲਿਆ ਸਮਝ ਲਿਆ ਸਾਰਾ ਦੁੱਖ ਚਲੇ ਜਾਂਦਾ ਉਹ ਬਿਰੋਹ ਚਲਾ ਜਾਂਦਾ ਹੋਜੀ ਨਾਨਕ ਨਾਮ ਜਪਤ ਸੁਖ ਉਪਜੈ ਦਰਗਾ ਪਾਈਏ ਥਾ ਤੇ ਨਾਮ ਜਪਣ ਦੇ ਨਾਲ ਸੁਖੇ ਸੁਖ ਪੈਦਾ ਹੁੰਦੇ ਨੇ ਦਰਗਾ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ ਬਾਬੇ ਦਰਗਾ ਕੀ ਆਂਦਾ ਸਦਾ ਹੀ ਜੀਵਨ ਮੁਕਤ ਹੋ ਜਾਂਦਾ ਰਗਾ ਹਿਰਦਾ ਹੀ ਐ ਦਰੇ ਟਿਕ ਜਾਂਦਾ ਮਹੱਲਾ ਪੰਜਵਾਂ ਮਾਨਕ ਨਾਮ ਧਿਆਈ ਐ ਗੁਰਪੂਰਾ ਮਤ ਦੇ ਭਾਣੇ ਜਪ ਤਪ ਸੰਜਮੋ ਭਾਣੇ ਹੀ ਕੱਢ ਲੈ ਗੁਰਪੂਰਾ ਇਹ ਮਤ ਦਿੰਦਾ ਕਹਿੰਦਾ ਨਾਮ ਤੇ ਧਿਆਨ ਰੱਖੋ ਨਾਮ ਅੰਦਰ ਹਿਰਦੇ ਚ ਸੁਣਨਾ ਉਥੇ ਧਿਆਨ ਟਿਕਾਓ ਉਹ ਸੁਣਨਾ ਉਥੋਂ ਉਠੜੇ ਜੋ ਅੰਤਰ ਆਸਮਾਨੀ ਆਵਾਜਾ ਉਂ ਧਿਆਨ ਰੱਖੋ ਪਹਿਲੂ ਪਹਿਲੀ ਸਟੇਜ ਤੋਂ ਚੱਲਦੀ ਹੈ ਪਾਣੀ ਜੱਬ ਤੱਕ ਸੱਜਣ ਪਾਣੀ ਨਹੀਂ ਚੱਲਣਾ ਜਾਂ ਚ ਰਹੂ ਹੋਈਏ ਸਾਗਰ ਜੋ ਚੱਲਣਾ ਹੀ ਸਭ ਹੈ ਸਾਡਾ ਹਾਂਜੀ ਪਾਣੇ ਜੋ ਨਹੀਂ ਪਵਾਈਆਂ ਬਖਸ਼ ਕਰੇ ਪਾਣੇ ਦੁੱਖ ਸੁੱਖ ਭੋਗੀਆਂ ਪਾਣੇ ਕਰਮ ਕਰੇ ਜਿਹੜਾ ਆਪਣੇ ਪਾਣੀ ਚੱਲਦਾ ਛੁੱਡੀਆਂ ਕੋ ਮਦਲਾ ਚੱਲਦਾ ਬਾਹਰ ਕੱਢਿਆ ਜਾਂਦਾ ہے ਦੋ پانے یہ ایک من کا پانا ایکจิต کا پانا ایک من کی اچھ ہے ایکจิต کی اچھ ہےจิต کی چاہ چھٹकारे دی ہے بھو پسندر تو باہر جاندی ہے من کی اچھ ہے جڑی ہے بھو پسندے دے وچ رہن دی ہے پدાર્થاں دے خوبے ہوئے ہے مایا دے نال لپٹے ہے مایا دے وچ رہنا چاہندا ہے مایا چھڑنی نہیں چاہندا سریر تیاگنا نہیں چاہندا ایدا ہی پانا ہے دو پرکار دا پانا ایک دا ہی ہے ਪਾਣੇ ਇਹਦੀ ਇੱਛਾ ਨਾਲੇ ਬਾਹਰ ਨਿਕਲਣਾ ਇਹਦੀ ਇੱਛਾ ਨਾਲੇ ਜੁਨੀਆਂ ਕਰਮ ਕਰੇ ਪਾਣੇ ਦੇ ਨਾਲੇ ਦੁੱਖ ਸੁੱਖ ਭੋਗਦਾ ਨਾਲੇ ਕਰਮ ਕਰਦਾ ਜਿਹੜੀ ਜੀ ਇੱਛਾ ਹੋ ਜਾਈ ਕਰਮ ਕਰਦਾ ਜੰਦਾ ਹੋਇਆ ਬਾੜ ਜੇ ਗੁਰ ਪਾਣੀ ਚਲਣਾ ਉਹ ਵੀ ਦੀ ਇੱਛਾ ਹੈ ਇੱਛਾ ਨਾਲੇ ਚਲੇ ਆਪਣੇ ਪਾਣੀ ਚਲਣਾ ਉਹ ਵੀ ਇੱਛਾ ਹੀ ਹੈ ਹਾਂਜੀ ਪਾਣੇ ਮਿੱਟੀ ਸਾਜਕ ਹੈ ਪਾਣੇ ਜੋਤ ਤਰੇ हां ओ गुण नाल ਮਿੱਟੀ ਆ ਸਾਡੀ ਐ ਵਿਜੋਤਰੀ ਐ ਉਹ ਪਰਮੇਸ਼ਰ ਦਾ ਕੰਮ ਐ ਪਰ ਇਹ ਉਹ ਤਾਂ ਕੋਬੇਣਾ ਨਾ ਸਰੀਰ ਸਾਜਿਆ ਜਾਂ ਪਰਮੇਸ਼ਰ ਦਾ ਭਾਣੇ ਮਨੈ ਕਰੇ ਆ ਭੋਗ ਜਿਹਨੇ ਕੋਬ ਦਾ ਬਦਾਰਥ ਭੋਗਦਾ ਐ ਆਪਣੀ ਇੱਛਾ ਨਾਲ ਭੋਗਦਾ ਤੇ ਇੱਛਾ ਦੀ ਭੋਗ ਭੋਗਣ ਦੇ ਵਿੱਚ ਇਹ ਬਦਾਰਥਾ ਚ ਰਹੂਗਾ ਜਾਂ ਚ ਰਹੂਗਾ ਭਾਣੇ ਦੇ ਵਿੱਚ ਹੀ ਆਪਣੀ ਇੱਛਾ ਭੋਗਾਂ ਦੇ ਵਿੱਚੋਂ ਬੋੜ ਸਕਦਾ ਹੈ, ਧਿਆ ਕਰ ਸਕਦਾ ਹੈ। ਜੇ ਇਹ ਛਟਕਾਰਾ ਪਾਉਣਾ ਫਿਰ ਭੋਗ ਬਦਲਣਾ ਪਊ, ਖਰਾਕ ਬਦਲਨੀ ਪਊ। ਬ੍ਰਹਮ ਗਿਆਨੀ ਦਾ ਫਿਰ ਗਿਆਨ ਕਰਨਾ ਪਊ। ਹਾਂਜੀ। ਭਾਣੇ ਨਰਕੀ, ਸੁਰਗੀ, ਔਤਾਰੇ। ਭਾਣੇ ਤਰਣ ਤਰੇ। ਆਪਣੇ ਬਾਲੇ ਨਾਲ ਨਰਕ ਸੁਰਗ ਦੇ ਔਤਾਰ ਲੈਂਦਾ ਫਿਰਦਾ ਹੈ। ਸੁਰਗ ਸੁਖੀ ਆ, ਰਹਿਣਾ ਸੰਸਾਰ ਚ। ਸੁਖੀ ਦੁਵੀਜ਼ ਹੋਵ ਨਹੀਂ ਹੁੰਦਾ ਇਹ ਸੁਖੀ ਮੰਨਦੇ ਨੇ ਚੰਗੀ ਜ਼ਿੰਦਗੀ ਚੰਗੇ ਪੈਸੇ ਵਾਲੇ ਚੰਗੇ بڑے ਘਰ ਪੈਦਾ ਹੋ ਜਾਂਦੇ ਬਹੁਤ ਆ ਕੋਈ ਸਰੀਰਕ ਤੌਰ ਤੇ ਪੰਡੂ ਹੁੰਦਾ ਬਿਮਾਰੀ ਹੁੰਦੀ ਹੈ ਸੰਸਾਰੀ ਸੁਖ ਨੂੰ ਇਹ ਦੁਰ ਕਹਿੰਦੇ ਨੇ ਰਹਿਣੇ ਤੋਂ ਇਹ ਐਸੇ ਸੰਸਾਰ ਛੋਣ ਦੇ ਇਹਦੀ ਇੱਛਾ ਦੇਈ ਹੈ ਜੇ ਸੰਸਾਰ ਤੇ ਰਹਿਣਾ ਹੈ ਉਹ ਸੁਰਗ ਨਰਕ ਵਿੱਚ ਐ ਜਾਂ ਸੁਰਗ ਨਰਕ ਤੇ ਤੋਂ ਬਚਣਾ ਹੈ ਗੁਰਮੁਖਤਾ ਸੁੁਰਗ ਨਰਕ ਨਾਲ ਕਿੰਨੋ ਇੱਕੋ ਜਿਹਾ ਸਮਝਦੇ ਰਹੇ ਸਤਗੁਰ ਕੇ ਉਪਦੇਸ਼ ਕਬੀਰ ਦਾ ਇਹ ਕਹਿੰਦਾ ਇਹ ਆਪਣੀ ਇੱਛਾ ਨਾਲ ਭੋਗਦਾ ਇਹ ਸੁੁਰਗ ਨਰਕ ਹਾਂਜੀ ਭਾਣੇ ਧਰਣੀ ਤਰੇ ਆ ਭਾਣੇ ਦੇ ਨਾਲੇ ਆ ਧਰਤੀ ਧਾਰਨ ਕਰਦਾ ਸਰੀਰ ਧਾਰਨ ਕਰਦਾ ਆਪਣੀ ਇੱਛਾ ਨਾਲ ਹਾਂਜੀ ਭਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਹੀ ऐसे भी ने पाणा जिला उनु भक्ति चला दंदा ए येता अपना गुरके पाणे चलदा भक्ति ला दंदा असल च दो हिस्से रे दे कुदी कने एक पल भला एक भक्ति लाए दो बण रे देई दे दोए एक पाणा भक्ति लाउंदा एक पाणा एदा पल भलोदे माया दी छाला ਇਹ ਭਗਤੀ ਲਾਇਆ ਸਭ ਤੇਰਾ ਹੁਕਮ ਅਪਾਰਾ ਤੇਰਾ ਹੀ ਹੁਕਮ ਆਪਾਰਾ ਦੋਏ ਇਹਦੇ ਹੀ ਹੁਕਮ ਦੇ ਦੋਏ ਭਗਤੀ ਚ ਲੱਗਣ ਵਾਲੇ ਵਿਰਲੇ ਹਨ ਜੀ ਅੱਗੇ ਵਾਲੇ ਬੰਦੇ ਠੀਕ ਹੈ ਜੀ ਹੋਰ ਵੀ ਸੱਚੇ ਨਾਮ ਕੀ ਹੋ ਜੀਵਾ ਸੁਣ ਸੁਣੇ ਪਸ਼ੂ ਪ੍ਰੇਤ ਅਗਿਆਨ ਉਧਾਰੇ ਸੱਚੇ ਰਾਮ ਦੀ ਜਿਹੜੀ ਵਡਿਆਈ ਹੈ ਨਾ ਕੁਰਬਾਨੀ ਇਹਨੂੰ ਸੋਚਣ ਜੀਵਨ ਮਿਲਦਾ ਸਭ ਦੇ ਜੁਣੀ ਜਾਵੇ ਫੁਰਦਾ ਰਹੇ ਕਾਲ ਦੂਰ ਰਹਿੰਦਾ ਜਮ ਕਾਲ ਨੇੜੇ ਹੀ ਹੁੰਦਾ ਸਰੀਰ ਤੇ ਆਕਣ ਦੀ ਗੱਲ ਹੋਰ ਹੈ ਦੀਦ ਆਉਣ ਦੀ ਗੱਲ ਹੋਰ ਹੈ ਬਿਰ ਪੈ ਪਸ਼ੂ ਪ੍ਰੇਤ ਅ ਗਿਆਨ ਉਧਾਰੇ ਇੱਕ ਪ੍ਰੇਤ ਅ ਗਿਆਨ ਇੱਕ ਖਿਰਦੇ ਵਿੱਚ ਉਹਨਾਂ ਨੂੰ ਆਧਾਰ ਕਰ ਦਿੰਦਾ ਇੱਕ ਪੰਕਤੀ ਵੀ ਜੇ ਬਣ ਲਵੇ ਕਮਾਲ ਵੇ ਨਾਲ ਪਿਆ ਸਾਰਾ ਜੀਵਨ ਬਦਲ ਜਨ ਹਾਂਜੀ ਦਿਨਸ ਰੈਣ ਤੇਰਾ ਨਾਮ ਸਦਾ ਸਦਾ ਜਾਪੀ ਐ ਕਰਕੇ ਤੇਰਾ ਨਾਮ ਜਿਹੜਾ ਹੈ ਤੇਰਾ ਜਸ ਜਿਹੜਾ ਹੈ ਉਹਨੂੰ ਸਮਝਣਾ ਚਾਹੀਦਾ ਉਹਨੂੰ ਵਿਚਾਰਨਾ ਚਾਹੀਦਾ ਗੁਰਬਾਣੀ ਨੂੰ ਵਿਚਾਰਨਾ ਚਾਹੀਦਾ ਵਿਚਾਰ ਨਹੀਂ ਆਪਣਾ ਗੁਰਬਾਣੀ ਨੂੰ ਵਿਚਾਰਨਾ ਗੁਰਬਾਣੀ ਉਹਦਾ ਨਾਮ ਹੈ ਸਮਾਇ ਇਹਨੂੰ ਲਟਕਦੇ ਰਹਿਣਾ ਚਾਹੀਦਾ ਬੁਲਾਉਂਦੇ ਰਹਿਣਾ ਚਾਹੀਦਾ ਇੱਕ ਚਪਾਸ ਮੱਖਣ ਨਿਕਲਦਾ ਜੇ ਤਤ ਨਿਕਲਦਾ ਉਹ ਖਾਣੋ ਚਾਹੀਦਾ ਹਾਂਜੀ ਕ੍ਰਿਸ਼ਨਾ ਭੁਖ ਵਿਕਰਾਲ ਨਾਏ ਤੇਰੇ ਧਰਾਪੀਐ ਕ੍ਰਿਸ਼ਨਾ ਕੋ ਭੁਖਾਉ ਤਲਕ ਨਹੀਂ ਹੈ ਜਿਹਨੂੰ ਉਹ ਮਿਲ ਜਿਹਦੇ ਨਾਮ ਮੰਨ ਬਸ ਜਾਂਦਾ ਹੈ ਗਿਆਨ ਪੁਰਬਾਨੀ ਦਾ ਰੋਗ ਸੋਗ ਜਿਹੜੇ ਉਹਨੂੰ ਜਿਹੜੇ ਵੀ ਨਹੀਂ ਹੁੰਦੇ ਵੱਜਾ ਦੂਰ ਚਲੇ ਜਾਂਦੇ ਨੇ ਉਹਤੇ ਰੋਗ ਸੋਗ ਸਭ ਮਿਟ ਗਏ ਦਿੱਤ ਹਾਂਜੀ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸ ਹੈ ਜਿਹੜੇ ਗੁਰਨੇ ਮਤ ਵਿੱਚ ਦੱਸਿਆ ਜਵਾਰ ਮਾਨ ਨੂੰ ਲਾਲ ਪੈਦਾ ਹੋ ਜਾਂਦੇ ਨੇ ਉਹਨੂੰ ਅੰਦਰ ਲਾंप ਦਾ ਅੰਦ ਚੜ ਜਾਂਦਾ ਜਿਹਦੇ ਅੰਦਰ ਗੁਣ ਬਸ ਜਾਂਦੇ ਨੇ ਜਿਹਨੂੰ ਰਸ ਆ ਜਾਂਦਾ ਗੁਰਬਾਣੀ ਦਾ ਉਹਦਾ ਰੰਗ ਚੜ ਜਾਂਦਾ ਉਦੇ ਰੰਗ ਚ ਰੰਗਿਆ ਜਾਂਦਾ ਠੀਕ ਹੈ ਜੀ ਖੰਡ ਬ੍ਰਹਿਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੇ ਖੰਡ ਬ੍ਰਹਿਮੰਡ ਦਾ ਬੇਸਹਾਰ ਕਰਨ ਵਾਲਿਆ ਉਹ ਕੌਣ ਹੈ ਇਹ ਆ ਬੇਅੰਤ ਖੰਡ ਬ੍ਰਹਿਮੰਡ ਰੇ ਸਾਰਿਆਂ ਦਾ ਉਧਾਰ ਕਰਨ ਵਾਲੇ ਤੂੰ ਇਹ ਚੇਤਨ ਨੂੰ ਕਹੇ ਜੀ ਖੰਡ ਬ੍ਰਹਿਮੰਡ ਹਾਂ ਖੰਡ ਬ੍ਰਹਿਮੰਡ ਚੇਤਨਾ ਨੇ ਉਹ ਜਾੜ ਉੱਤੇ ਬ੍ਰਹਮਾੰਡ ਲਫਦਾ ਜਾੜ ਦਾ ਪਰ ਪੜ ਉਜਾੜ ਹੁੰਦਾ ਖੰਡ ਬ੍ਰਹਮੰਡ ਦੇ ਦੋਚਿਆਂ ਵਿੱਚ ਬ੍ਰਹਮੰਡ ਦਾ ਬ੍ਰਹਮ ਦਾ ਉਹਦਾ ਬੁਨੇ ਹਦਾ ਜਿੱਤਾ ਇਹ ਇਹਨਾਂ ਨੂੰ ਪੜਿਖਾ ਪੈਂਦਾ ਵੀ ਸੰਸਾਰ ਉਹਨਾਂ ਦਾ ਕੀ ਆਧਾਰ ਕਰਨਾ ਜੜ ਦਾ ਕੀ ਆਧਾਰ ਕਰਨਾ ਕੀ ਉਹਦਾ ਦੀਰ ਆਧਾਰ ਕਰਨਾ ਤੇਰੇ ਦਾ ਜੀਨ ਵਾਲੇ ਤੂੰ ਜੀ ਪੇਲੀ ਜਾ ਤੁਦ ਸੱਚੇ ਮੇਰੇ ਪਿਆਰੇ ਤੂੰ ਹੀ ਆਪਣੀ ਜ਼ੋਬਾ ਆ ਪਈ ਤੇ ਹੀ ਉਸ ਤੇ ਤੁਮਤੇ ਹੋਏ ਸੱਚੇ ਮੇਰੇ ਪਿਆਰੇ ਮੇਰੇ ਸੱਚੇ ਮੇਰੇ ਪਿਆਰੇ ਤੂੰ ਆਪਣੀ ਜ਼ੋਬਾ ਆ ਪਈ ਠੀਕ ਹੈ ਜੀ